ਅਸ਼ਪਦੀ ਸਿਮਰੂ ਸਿਮਰ ਸਿਮਰ ਸੁਖ ਪਾਵਨ ਸਿਮਰ ਲਈ ਇਹ ਸਿਮਰੂ ਸਿਮਰੋ ਸਿਮਰੋ ਸਿਮਰੋ ਸਿਮਰੋ ਸਿਮਰੋ ਸਿਮਰੋ ਨਾ ਸਿਮਰੋ ਸਿਮਰਦਾ ਰਹੋ ਸਿਮਰੂ ਮੈਂ ਸਬਰ ਰਿਹਾ ਹਾਂ ਸਿਮਰੂ ਪ੍ਰੈਜ਼ੈਂਟ ਕੰਟੀਨਿਊਸ ਰੱਖੋ ਪੂਰੇ ਅੰਪੁਰ ਦੀ ਸੰਰੋ ਸਬਰ ਸਬਰ ਸਿਮਰ ਸਿਮਰ ਸੁਖ ਪਾਉ ਪਾਉ ਪਾਉ ਪਾਉ ਪਾਉ ਸੰਰੋ ਸਬਰ ਸਿਮਰ ਸਿਮਰ ਸੁਖ ਪਾਉ ਕਲ ਕਲੇਸ਼ ਤਨ ਵਾਹੇ ਬਿਟਾਉ ਇਸ ਤਨ ਵਾਹੇ ਬਿਟਾਉ ਆਪਣੇ ਹਿਰਦੇ ਚ ਆ ਜਿਹੜਾ ਕਲੇਸ਼ ਆਇਆ ਹੈ ਕਲ ਸਮਾਂ ਦੀ ਬਾਯਾ ਦੀ ਖੁੱਖ ਨੇ ਜਿਹੜਾ ਕਲੇਸ਼ ਆਇਆ ਹੈ ਕ੍ਰਿਸ਼ਨ ਇਹਦਾ ਜਿਹੜਾ ਤਨ ਚੋਂ ਵਢਾ ਦੇ ਸੋ ਸਮਨ ਦਾ ਜੇ ਅਰਪਣਾ ਦਾ ਜਿਹੜਾ ਕ੍ਰੇਸ ਪਾਇਆ ਹੋਇਆ ਹੈ ਰਿਸ਼ਨਾ ਦੀ ਅਗਰੇ ਦੀ ਅੰਦਰ ਚਲਦੀ ਹੈ ਇਹ ਬਿਝਾਰਿਆ ਮਨ ਸੁਖਤਾ ਮਿਲਦਾ ਤੇ ਜਿਸ ਨੂੰ ਜੇ ਸਿਮਰਨ ਦੇ ਨਾਲ ਆਪਣੀ ਨਾਲ ਕਰੇ ਜੋ ਪਰਸਵਤ ਖੁਗੀ ਹੱਗ ਕੀਤੀ ਹੈ ਮਰ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ ਆਸਪਰ ਰਿਹਾ ਹੋਰ ਲਗਾਤਾਰ ਉਹ ਤੋਂ ਸੁਖ ਪ੍ਰਾਪਤ ਹੋ ਰਿਹਾ ਜੇ ਸੁਖ ਦੀ ਪ੍ਰਾਪਤ ਹੋ ਸਮਨ ਹੈ ਬੈਨੂ ਕਿਉਂ ਹੋਇਆ ਥੋੜੂ ਕਿਉਂ ਨਹੀਂ ਹੋ ਰਿਹਾ ਦੂਜਿਆਂ ਨੂੰ ਬਤਾਵਾ ਲੈ ਸਮਝੇ ਪੱਲੇ ਦੇ ਵਿੱਚ ਹੀ ਮਾਰਿਆ ਚੱਕਰ ਸਾਹਾਂ ਦੇ ਉੱਤੇ ਦੀ ਤੂੰ ਜਿਹੜਾ ਸਿਮਰ ਸਿਮਰ ਦੋ ਵਾਲੀ ਆਇਆ ਦੋਹਾਂ ਦੇ ਸਹਾਰੇ ਮਾਰਿਆ ਹੋਇਆ ਤੂੰ ਤੇ ਵੀ ਮਾਰਿਆ ਸਾਹਾਂ ਦੇ ਜੇ میں سمجھتا نہ تاں تے میںสุข પ્રાપ્ત نہیں آں کلکلیش ہے جڑا رلیسٹ تو مانی بیٹا جو کی بھی کلکلیش مٹا رہے کلکلیش تو مانی بتاو فلتے وچوں مٹا رہے تے اے سمجھن ودج اے نہیں او جے اے لکشن سمجھندے نہیں اے کچھ نہیں ہو رہا تے سمجھ نہیں بس جے کلکلیشن ندروں ختم نہیں ہو رہا کلکلیش تے ਜਿਹਦੇ ਨੂੰ ਕੈਨਟੀ ਲੋਡ ਨਹੀਂ ਸਬਲ ਰਹੀ ਹੁੰਦਾ ਆ ਟੈਸਟ ਦਾ ਕੰਪਿਊਟਰ ਆਪਾਂ ਨੂੰ ਇਹ ਵੀ ਲੋਡ ਹੋਣ ਬੈਂਕ ਆਫ ਦੀ ਕੀ ਹੁੰਦਾ ਜਿਹੜੇ ਦਵਾਈ ਖਾਣੀਆਂ ਆਪਣੇ ਵਾਸਤੇ ਖਾਣੀਆਂ ਹੋਈਆਂ ਬਹਮਾਰੀ ਉਹ ਨੂੰ ਜੇ ਉਹ ਚਾਹੁੰਦਾ ਮੈਂ ਤਬ ਉਹ ਰੱਖਣੀ ਹੈ ਉਹਨੂੰ ਅਸਲੀ ਦਵਾਈ ਦੇ ਦੇ ਖਾਣੀ ਹੋਦੀ ਠੁਕ ਉਹਨੇ ਤਾਂ ਰੱਖਣੀ ਹੈ ਇਹ ਤਾਂ ਦੱਸ ਦਿੰਦਾ ਵੀ ਆਹ ਗੱਲ ਐ ਸਿਮਰ ਕੇ ਸੁਖ ਮਿਲਦਾ ਕਿਆ ਤਾਂ ਪੁੱਛ ਲੋ ਆ ਕੇ ਮੈਨੂੰ ਭਾਈ ਤੁਹਾਡਾ ਕਿਹਾ ਜੇ ਜੀ ਤੋ ਕਿਹਦੀ ਦੋ ਜੀ ਨਾ ਆ ਜਾ ਸੁਣਣਾ ਗਣ ਕਲਕੂਲੇਸ਼ਨ ਕਿਵੇਂ ਕਰ ਸਵਾਰ ਖੜਾ ਹੋ ਗਿਆ ਜੇ ਦਹੀ ਵੜਦਾ ਨੂੰ ਤੁਹਾਡੇ ਨਾ ਕਰ ਮਾਰਦਾ ਕੀ ਬੋਲਦਾ ਸੱਚ ਬੋਲਦਾ ਝੂਠ ਬੋਲਦਾ ਝੂਠੀ ਬੋਲਦਾ ਕੋਈ ਹੁੰਦੇ ਆ ਕੇ ਦੇਖ ਲੋ ਕਸ਼ ਕਰ ਲੋ ਇਹ ਕਥਾ ਕਥਾ ਹੈ ਕਿ ਖਿਆਨਾ ਮੁਕਾਇਆ ਮੁਕਦਾ ਨਹੀਂ ਆਜੋ ਜੀ ਬ੍ਰਹਮੰਡ ਦੀ ਬਾਹਰ ਸੀ ਨਾ ਉਹ ਚਾਇਆ ਨਾ ਅੰਦਰ ਚੱਲਾ ਗੁਰ ਚੱਲਾ ਗੁਰ ਸਮਝ ਤੋੜਨਾ ਆ ਕੇ ਖੜੀ ਪਰਮੇਸ਼ਵਰ ਗਿਆਨ ਆ ਜਾਂਦੀ ਹੈ ਸਭ ਬਕਵਾਸ ਕਰਦੇ ਨੂੰ ਕੰਮ ਕਰਦਾ ਇੱਕਦਮ ਬੋਲਣ ਲੱਗਿਆ ਪਤਾ ਲੱਗ ਜਾਂਦਾ ਉਹ ਕਹਿੰਦਾ ਵੀ ਹੁਣ ਵਿਚਾਰ ਦਮਿਆ ਠੀਕੀ ਕਰਕੇ ਕਰਕੇ ਬੋਲਣੇ ਪਰ ਇਹ ਜਿਹੜੇ ਸ਼ਬਦ ਅੰਦਰ ਹੈ ਇਹਨੇ ਜ ਸਾਹ ਬੋਸਾ ਨਾ ਜੀ ਨਾਲ ਜਿੱਕੇ ਜੁਰੂਰੀ ਮੈਂ ਆਹੇ ਲੋ ਕਿਹਨਾਂ ਤੇ ਦੇਖ ਲੋ ਦੋ ਚਾਰ ਸ਼ਾਲ ਕਲਾਸ ਬਹਿ ਜਾਓ ਆਪੇ ਬੋਸਾ ਰੱਖ ਜੀ ਯਾ ਤੁਸੀਂ ਤਿਆਰੀ ਕਰਾਣੇ ਬੈਠੇ ਹੋ ਫੜ ਰਹੇ ਹੋ ਘੰਟੇ ਨਾਲ ਰਹੇ ਤੁਸੀਂ ਤਿਆਰੀ ਕਰਦੇ ਪਹਿਲਾਂ ਲੱਗ ਜੂ ਤਿਆਰੀ ਕਰ ਗੱਲ ਹੁੰਦੀ ਹੈ ਦੋਵੇਂ ਗੱਲ ਆਉਦੇ ਹੀ ਕਿ ਨਹੀਂ ਹੁੰਦੀ ਤੁਸਾਂ ਆਪੇ ਬੋਸਾ ਰੱਖ ਜੀ ਜਿਹਨਾਂ ਨੇ ਕਹਿ ਜੋੜ ਨਹੀਂ ਬੋਲਿਆ ਜੇ ਚੁੱਟ ਬੋਲਦੇ ਅਗਲੇ ਲਿਖਨਦੇ ਉਹ ਉਹ ਵੀ ਬਹੁਤ ਕੁਝ ਪੈ ਸਕਦੇ ਸੀ ਜੋ ਗੁਰਬਾਣੀ ਨੇ ਲਿਖਿਆ ਦੇ ਸਾਡੇ ਦੂਸਰੀ ਤਰ੍ਹਾਂ ਜਰਰ ਚੁੱਤੀ ਹੈ ਪਹਿਲਾਂ ਨੇ ਸਾਬਤ ਕੀਤਾ ਹੈ ਸਭ ਕੁਝ ਜਦੋਂ ਤੁਸੀਂ ਕਹਿੰਦੇ ਲੈਸ ਤੇ ਆ ਕੇ ਬੰਨ ਕੇ ਨੇ ਤੇ ਉਹ ਤਾਂ ਹੀ ਆਣਾ ਬਾਜ਼ਾਰ ਕਰਕੇ ਹਟ ਖੜ ਕੇ ਬੰਦੇ ਪੇ ਸੀ ਆਪਣੀ ਕੂੜਿਆ ਦਾ ਰਹਿਣ ਕੂੜਿਆ ਨਾਲ ਪਾਇਆ ਜਾਲ ਉੱਠਿਆ ਸਭ ਉਹ ਪਹਿਲਾਂ ਊੜੇ ਨਾਲ ਗਿਆ ਸਿਮਰੋ ਸਿਮਰਣਾ ਹਾਂ ਫਿਰ ਗਿਆ ਸਿਮਰ ਸਿਮਰ ਕੇ ਸਿਮ ਸਿਮਰ ਸਿਮਰ ਦੋ ਵਾਰੀ ਆਲੇ ਵਿੱਚ ਹੈਗੀ ਹਾਂ ਦੋਏ ਸਿਮਰ ਦੋ ਵਾਰੀ ਸਿਮਰ ਲਾਇਆ ਕੇ ਤੋ ਸਿਮਰੋ ਸਿਮਰ ਸਿਮਰ ਸੁਖ ਪਾਉ ਉਹ ਸਿਮਰ ਸਿਮਰ ਕੀ ਮਤਲਬ ਹੈ ਵੀ ਉਹਨਾਂ ਦਾ ਵੀ ਹੈ ਸਿਮਰ ਨੂੰ ਕਰ ਮਾਤਾ ਹੂੰ मैं ਸਮਾਂ ਦੇ ਰਿਹਾ ਕਰ ਰਿਹਾ ਜਿਵੇਂ ਵੀ ਕਰ ਰਿਹਾ ਮੈਂ ਆਪਣਾ ਕਾਲਜ ਲੈ ਚ ਮਟਾ ਰਿਹਾ ਹਾਂ ਔਰ ਸੁਖ ਪਾਉ ਸੁਖ ਪਾਉ ਕਿਉਂ ਕਿਸ ਤਰੀਕੇ ਨਾਲ ਕਿਉਂ ਮੈਨੂੰ ਸੁੱਖ ਹੁੰਦਾ ਕਾਹਦਾ ਸੁੱਖ ਹੁੰਦਾ ਕਾਲਜ ਲੈ ਇਸ ਤਰ੍ਹਾਂ ਮੈਂ ਹੈ ਉਹ ਬਿਟਾ ਉਹ ਤਾਂ ਸਭ ਦੱਸਿਆ ਵੀ ਕੀ ਹੈ ਜੇ ਤਾਂ ਕੈਲਕੂਲੇਸ਼ਨ ਸਤੂ ਹੋ ਰਿਹਾ ਹੈ ਜੇ ਸੁਖ ਹੋ ਰਿਹਾ ਤੋ ਸੁਖ ਹੋ ਰਿਹਾ ਸੁਖ ਸੁਖ ਵੀ ਹੋ ਰਿਹਾ ਹੈ ਜੇ ਸੁਖ ਇਹ ਨਹੀਂ ਹੋ ਗੱਲ ਲੇਤੀ ਇਹ ਸਿਮਰ ਸਿਮਰ ਕੇ ਸਿਮਰ ਸਿਮਰ ਕੀ ਆਊਗਾ ਹਾਂ ਸਿਮਰ ਸਿਮਰ ਸਿਮਰ ਕੇ ਜਿਹੜੀ ਆਪਣਾ ਉਹ ਜਿਹ ਮਿਜਨੀ ਵੀ ਸਿੱਧਾ ਤੁਸੀਂ ਪੜਿਆ ਹੋਣਾ ਬਹੁਤ ਗੁਰੂ ਵੀ ਆ ਹੀ ਰਹੀ ਐ ਜਿਹੜਾ ਉਹ ਲਾਇਆ ਉਹਨੇ ਲਿਖਾ ਗੋਰ ਸਤ ਗੁਰ ਵਾਲਾ ਆਈ ਸਤ ਗੁਰ ਵਾਲਾ ਜਿਵੇਂ ਆਉਂ ਹੋਏ ਉਹ ਦੱਸਿਆ ਹਾਂ ਤੁਹਾਨੂੰ ਬਦਕਾਰ ਤੋਂ ਭੋਲੇ ਨੂੰ ਚੰਗੀ ਤਰ੍ਹਾਂ ਆਸੀ ਗੱਲ ਨਹੀਂ ਉਹ ਗੱਲ ਲੱਗਿਆ ਵੀ ਮਤਲਬ ਇੱਕ ਮੰਨਦਾ ਜਿਹੜੇ ਉਹ ਕਾਰਕ ਵਿੱਚੋਂ ਮੈਂ ਦਾਰ ਫਰਜ਼ੀ ਜਿਵੇਂ ਕਈ ਵਾਰੀ ਹੁੰਦਾ ਕਿ ਜਦੋਂ ਸਟਾਰਟ ਕਰੇ ਕਿ ਜਦੋਂ ਕਰਤਾ ਕਰ ਗਿਆ ਜਿੱਥੇ ਹੂੰ ਕਿ ਜਦੋਂ ਕਈ ਵਾਰੀ ਨਾਨਕ ਦੇ ਨੂੰ ਸਿਹਾਰੇ ਲਾ ਕੇ ਜਿਹੜੀ ਹੈਗੀ ਆ ਉਹਦੇ ਵਿੱਚ ਕਾਫੀ ਮਿਲ ਹੈਗਾ ਉਹਦੇ ਹੈ ਜਾਏ ਕੁਝ ਵੀ ਉਹਨਾਂ ਲੋਕ ਕਹੁੰਦਾ ਇਹ ਵਾਲਾ ਨਹੀਂ ਦਾ ਜਾਣ ਦੇ ਉਹ ਬਕਤੇਸ਼ਰ ਨਾਲ ਗੱਲ ਕਾਰ ਕੋਲ ਤੇ ਮੈਂ ਭਾਈ ਪੁੱਛ ਰਹੀ ਮੈਂ ਤੁਹਾਨੂੰ ਕਹਿੰਦੀ ਹੁਣ ਜਿਹੜਾ ਜਿਹੜੀ ਹਰ ਦੇ ਰਾਣ ਆ ਰਹੀ ਹੈ ਹਰੀ ਉਹ ਦਾ ਵਿੱਚ ਜਿਹੜਾ ਆ ਰਿਹਾ ਸੇ ਉੱਥੇ ਨਹੀਂ ਲੱਗ ਰਿਹਾ ਕਿ ਜਿਵੇਂ ਉਹ ਜਿਵੇਂ ਨੇ ਜਿੱਦੀਆਂ ਨੇ ਵਿੱਚ ਉਹ ਬਣੀ ਜੋ ਜਿਹੜਾ ਹਰ ਲੱਭ ਜਾਉਂਦਾ ਕਈ ਵਾਰ ਕਈ ਵਾਰ ਹਰ ਕਈ ਵਾਰ ਆ ਜਾਂਦਾ ਚਾਰ-ਚਾਰ ਵਾਰੀ ਉਥੇ ਕਿਹੜਾ ਲੱਗ ਲਾਉਂਗੇ ਹਾਂ ਜਿਵੇਂ ਆਪਾਂ ਕਈ ਵਾਰੀ ਨਾਲ ਆਇਆ ਹੈ ਉਥੇ ਨੀਯਮ ਵਿਆਹ ਕਰਨ ਤਾਂ ਲੱਗ ਕੋਈ ਨਹੀਂ ਰੁਕਤਾ ਤੇ ਆ ਬੜੀ ਤੇ ਬੇਗਦਾ ਕਰਨ ਲੱਗੂਗਾ ਕਰਨ ਤਾਂ ਲੱਗੂ ਹੀ ਨਹੀਂ ਹੋ ਸਕਦੀ ਉਥੇ ਇਹ ਜਿਵੇਂ ਨਹੀਂ ਲੱਗੂ ਸਾਰੇ ਜਿਹੜਾ ਆਪੇ ਤਾਂ ਨਾ ਉਹ 20 ਸੋਬੀ ਜਿਹੜੀ ਲੱਗੂਗੀ ਵੈਕਾਣ ਜਿਹੜੀ ਵੈਕਾਣ ਉਹਨੇ ਲਿਖਿਆ ਉਹਦੇ ਵਿੱਚ ਬੰਦੇ ਹੋਇਆ ਸਾਬ ਸੋਬੀ ਜਿਹੜੀ ਲੱਗੂ ਹੁੰਦੀ ਉਹ ਲੱਗੂ ਨਹੀਂ ਉਹ ਤੇ ਪਾ ਉਹ ਕਹਿੰਦਾ ਗੁਲੇਂਡੋਂ ਦੇਣ ਲੱਗੀ ਜਾ ਹੋਈ ਹੈ ਹਾਂ ਇਸੇ ਦਿਨ ਹਰ ਜੋ ਗੁਰ ਮੰਦਰ ਆਵਣਗੇ ਆਉਣੇ ਲੱਗਿਆ ਆਉਣਗੇ ਆਵੇਗੀ ਜੀ ਲੱਗਿਆ ਆਵੇਗੀ ਤੇ ਫਿਰ ਹਰਿ ਦਾ ਸਿਆਰੀਆ ਤੇ ਹੈ ਬਲੂ ਕੋਈ ਨਹੀਂ ਦਾ ਮਾਇਆ ਵਰਦਾ ਦੌਲੂਣੀ ਮਾਇਆ ਗਾਣ ਪੜੀ ਹੈ ਜ ਆਪਾਂ ਜਿਸ ਸਾਲ ਲਗਾਤਾਰ ਆਪਾਂ ਨੂੰ ਜੋ ਅੱppa ਜਾਣਦੇ ਆ ਬਿਆਕਾਣ ਵਾਲਾ ਤਾਂ ਉਧਰ ਪਹੁੰਚੇ ਨਹੀਂ ਸਕਦਾ ਜਿਹੜੀ ਉਹਨੇ ਬੜੀ ਉਧਰੋਂ ਜ਼ਿਆਦਾ ਪੜ੍ਹੀ ਹੈ ਜੇ ਉਹ ਲਾਗੂ ਕਰਦਾ ਆਪ ਸਾਡੇ ਨਾਲ ਸਰਗਰਮ ਤੇ ਉਹ ਪਾਉਂਦੇ ਚੱਲਾ ਗਿਆ ਜੇ ਆਪਾਂ ਉਹ ਲਾਉਣ ਲੱਗ ਗਿਆ ਇਹਵੇਂ ਤੂੰ ਰਹਿਣ ਰੇ ਆਪਣੀ ਅਕਲ ਪਿੱਛੇ ਰੱਖ ਇਹ ਸਾਡੇ ਨਹੀਂ ਲਾਗੂ ਕੀ ਉਹਰੇ ਅਸੀਂ ਇਹਦੇ ਵਿੱਚ ਨਿਕਲ ਜਾਂਦੇ ਫਿਰ ਇਹਦੇ ਵਿੱਚ ਨਹੀਂ ਉੱਥੇ ਹੀ ਨਹੀਂ ਹੋ ਰਹੀ ਲੱਗੂ ਮੈਂ ਤਾਂ ਹਰੀ ਜੀ ਨੇ ਉੱਥੇ ਕਿਹੜਾ ਹੈ ਹਾਂ ਉੱਥੇ ਸਾਡ ਨੂੰ ਕਿਹੜਾ ਹੈ ਉੱਥੇ ਕਿਹੜਾ ਹੈ ਉੱਥੇ ਕਿਹੜਾ ਫਿਰ ਉੱਥੇ ਉੱਥੇ ਨਹੀਂ ਲੱਗੂਈ ਉੱਥੇ ਚਲੋ ਐ ਇਸ ਲੱਕ ਦੀ ਗੱਲ ਹੈ ਉਹ ਤਾਂ ਨਹੀਂ ਵਿਆਹ ਕਰਨ ਤਾਂ ਗੁਰਬਾਨੀ ਤੇ ਲਾਗੂ ਹੋਏ ਨਹੀਂ ਸਿੱਧੀ ਗੱਲ ਮੈਂ ਕਹਿਣਾ ਉਹ ਵਿਆਹ ਕਰਨ ਦੀ ਗੱਲ ਤਾਂ ਨਾ ਕਰਨ ਦਾ ਕੁਝ ਬੇਦਬਾਹ ਇੱਥੇ ਇਹ ਅਰਥ ਕਿਉਂ ਨੇ ਕਿ ਕਿਉਂ ਨਹੀਂ ਜਵਾਬ ਸਾਡੇ ਕੋਲ ਇਹ ਹੈ ਕਿ ਅਨਰ ਸੋ ਜਾਣਗੇ ਅਰਥਾਂ ਦੇ ਅਨਰ ਤੋਂ ਬਚਾਉਣ ਵਾਸਤੇ ਕਿਉਂ ਆਹ ਹਲ ਬੋਲਦੇ ਆ ਮੈਂ ਬੇਦਬਾਹ ਵਿਆਹ ਕਰ ਸਕਦੇ ਬੇਦਬਾਹ ਵਿਆਹ ਕੀ ਹੈ ਵੇਦ ਵਿਆਖਾ ਕਰਨ ਦਾ ਹੱਥ ਕਰੂਗੀ ਵੀ ਇੱਥੇ ਆ ਵੀ ਹੱਥ ਨੇ ਹੋ ਰਿਹਾ ਹੋ ਰਿਹਾ ਹੋਰ ਕਰਨ ਦਾ ਦਾ ਗਿਆਨ ਚਾਹੀਦਾ ਸਾਨੂੰ ਇੱਥੇ ਲਿਖਣਾ ਨਹੀਂ ਲੱਗਣਾ ਜੇ ਤੁਹਾਡੇ ਕੋਲ ਅਰਥ ਬੋਧ ਹੈ ਜਿੱਨਾ ਚਿਰ ਅਰਥਬੋਧ ਨਹੀਂ ਹੈ ਤੁਹਾਡੇ ਕੋਲ ਤੁਸੀਂ ਉਹ ਸਮਝਿਆ ਕਰਨ ਬੁਲਾਈਏ ਨਹੀਂ ਹੋ ਸਕਦੀ ਬੁਲਾਈਏ ਦੀ ਤੁਸੀਂ ਅਪਲਾਈ ਕਰਦ ਕਰ ਲਓਗੇ ਤੁਸੀਂ ਲੱਗ ਬੇਦ ਗਿਆ ਵੀ ਗਿਆਨ ਦਸੂ ਉੱਥੇ ਹਾਂ ਉਹ ਲੱਗਣਾ ਕਿ ਨਹੀਂ ਲੱਗਣਾ ਧਿਆਨ ਦਸੂ ਉੱਥੇ ਅਰਥਬੋਧ ਦਸੂਗਾ ਤੁਹਾਡਾ ਅਰਥਬੋਧ ਅੱਜ ਵਾਰੀ ਆਪਾਂ ਦੇਖਿਆ ਤੇ ਮਿਸਟਰ ਪ੍ਰਿੰਟ ਨਾਲ ਲੱਗੇ ਹਾਂ ਕਈ ਵਾਰੀ ਆਪਾਂ ਇੱਥੇ ਮੈਂ ਦੇਖਿਆ ਨਾ ਵਿਆਖਿਆ ਦੇ ਵਿੱਚ ਵੀ ਇਹਦੇ ਤੇ ਮਿਸਪ੍ਰਿੰਟ ਹੈ ਉੱਥੇ ਉੱਪਰ ਜਾ ਉੱਪਰ ਚਾਹੀਦੀ ਨਹੀਂ ਜਾਂ ਲੱਗ ਵੀ ਨਹੀਂ ਜਾਂਦੀ ਸੀ ਠੀਕ ਉੱਥੇ ਜਿਹੜੀ ਕਿ ਮੈਂ ਬੋਲਦਾ ਨਾ ਦੀ ਪੁਸਤਕ ਮੇਰੇ ਕੋਲ ਐ ਨਹੀਂ ਆਏ ਕਿਉਂਕਿ ਉਹ ਗਿਆਨ ਦਾ ਗਿਆਨ ਵਿਆਕਰਨ ਜਿਹੜੀ ਗਿਆਨ ਦਾ ਗਿਆਨ ਹੈ ਉੱਥੇ ਲੱਗੂ ਦੇਸ ਵੇਖਣੇ ਦਾ ਗੁਰੂ ਹਾਜੀ ਸਿੰਘ ਜੀ ਆਣੀ ਸਿਮਰੋ ਜਾਸ ਦਸੰਬਰ ਨਾਮ ਜਬਦ ਅਗਨਤ ਅਨੇਕੈ ਸਿਮਰੋ ਸਿਮਰੋ ਜਾਸ ਦਸੰਬਰ ਏਕੈ ਸਿਮਰੋ ਜਾਸ ਦਸੰਬਰ ਦਸੰਬਰ ਸਿਮਰੋ ਜਾਸ ਦਸੰਬਰ ਤੇ ਫਿਰ ਬੋਲਣਾ ਸਮਰਨਾ ਕਿਨੂ ਕੋਰੋਂ ਸਮਰੋ ਤੋ ਕੌਣ ਹੈ ਜਨਤ ਦਸੰਬਰ ਉਹਨਾਂ ਦਸੰਬਰ ਇੱਕ ਆਇਆ ਜੋ ਇਦੋਂ ਇਹ ਦਸੰਬਰ ਉਹ ਉਹ ਇੱਕ ਹੀ ਹੋਵੇ ਤੋ ਕਾਹ ਗਾਇ ਸਮਰਨਾ ਕਿਨੂ ਦੱਸਦਾ ਮੈਂ ਸਮਰਨਾ ਸਮਨ ਸਭ ਨੂੰ ਵਿਸ਼ਬ ਜੀ ਨੇ ਭਰਿਆ ਹੈ ਵਿਸ਼ਬ ਆ ਸਾਰਾ ਵਿਸ਼ਬ ਹੈ ਨਾ ਜਿਹਦੀਆਂ ਜੁੜੀਆਂ ਜਿਹੜਾ ਸਾਰਿਆਂ ਦੇ ਵਿੱਚ ਹੈ ਉਹ ਨੂੰ ਸਬਤ ਦਬਤ ਸਭ ਤੋਂ ਹੈ ਵਿਸ਼ਵਾ ਜੋ ਵਿਸ਼ ਕੋ ਉਹ ਨੂੰ ਕਹਿੰਦੇ ਨੇ ਜਿੱਥੇ ਆਤਮਾ ਹੋਵੇ ਜਗ ਉਹ ਕਹਿੰਦੇ ਨੇ ਜਿੱਥੇ ਜੀਵਨ ਹੋਵੇ ਜਦੈ ਜੀਵਤੀ ਉਹ ਜਗਦੀ ਹੈ ਉਹ ਜਗਦੀ ਹੈ ਲੈਂਡ ਦਾ ਨੋ ਬਿਸ਼ ਬਗਾਈ ਜਾਂਦੇ ਨੇ ਹੈ ਨਾ ਮਣ ਕੇ ਉਹ ਚਲੋ ਉਹਨਾਂ ਦਾ ਲੈਂਡ ਦਾ ਨੋ ਬਿਸ਼ ਨਹੀਂ ਹੈ ਉਹ ਜੀ ਤਸੱਬਰ ਦਾ ਬਿਲਕੁਲ ਪਾਚ ਹੈ ਭਰਿਆ ਹੋਇਆ ਹੈ ਉਹ ਬਸੱਬਰ ਜੂਡੀਰ ਉਹਥੇ ਸਾਡੇ ਕੋਲ ਪਹਿਲਾਂ ਕੀ ਹੈ ਪਹਿਲਾਂ ਸਾਡੇ ਕੋਲ ਪਾਣੀ ਆ ਕਾਸ਼ ਵੀ ਆਟਾ ਹਵਾ ਵੀ ਵਖਰੀ ਹੈ ਅੱਗ ਵੀ ਵਖਰੀ ਹੈਗੀ ਹੈ ਸਾਡੇ ਕੋਲ ਠੀਕ ਹੈ ਇਹ ਚੀਜ਼ਾਂ ਵਖਰੀਆਂ ਹੋਟੀਆਂ ਨੇ ਸਾਡੇ ਵਿੱਚ ਮਿੱਟੀ ਵੀ ਵਖਰੀ ਹੈਗੀ ਹੈ ਸਾਡੇ ਕੋਲ ਤੇ 5-7 ਬੂਝੂ ਨੇ ਇਹ ਵੀ ਸ਼ੁੱਧ ਹੁੰਦੇ ਨੇ ਜਿਹਦੇ ਕੱਦ ਬੇਸ਼ਵ ਹੈ ਜਿੱਤੇ ਚਿੰਤਾ ਬੇਸ਼ਵ ਹੈ ਜਿੱਥੇ ਉੱਥੇ ਜਿੱਥੇ ਜੇਤਨ ਜਿੱਥੇ ਚੇਤਨ ਉੱਥੇ ਵਿਸ਼ਵ ਹੈ ਇਹ ਵਿਸ਼ਵ ਸੰਸਾਰ ਵਿਸ਼ਵ ਸੰਸਾਰ ਸੰਸਾਰ ਸਹਿਸਾ ਇਹ ਸੰਸਾਰ ਜਿਸ ਚਿੱਤ ਦਾ ਸੰਸਾਰ ਹੈ ਜਿਸ ਜੀਵਾਤਮਾ ਉਹ ਵਿਸ਼ਵ ਹੈ ਜਿਸ ਵੀ ਜੀਵਾਤਮਾ ਨੂੰ ਮਿਲ ਹੈ ਉਹ ਮਾਇਆ ਜਿਸ ਜੀਵ ਨੂੰ ਉੱਥੇ ਜਿੰਤਾ ਹੈ ਪਸਰ ਮਾਇਆ ਜਿੱਥੇ ਜੀਵ ਆਸਮਾਨੀ ਉਹ ਮਾਇਆ ਦਾ ਹੈ ਉਹ ਤੋਂ ਰਿਪ ਮਾਇਆ ਕਹਿੰਦੇ ਨੇ ਜੋ ਜਦਿਸੇ ਸੋ ਇਹ ਮਾਇਆ ਜਿੱਥੇ ਦੀਸੇ আর ਅਣ ਦੋ ਇਕੱਠੇ ਰਹੇ ਉਹ ਵਿਸ਼ਵ ਹੈ ਦੇਸਾ ਸਰੀਰ ਆਦੋ ਦੀਦੀ ਉਹ ਜਾਗਿਆ ਵਿਸ਼ਵ ਉੱਥੇ ਹੀ ਤੇ है! ਹੈ ਇਹ ਵਿਸ਼ਵ जो ਜੋ ਤੂੰ ਤੂੰ ਜੋ ਦੇਖਦਾ ਅਕਾਰ ਚੱਲਦਾ ਨਹੀਂ ਉਹ ਅਕਾਰ ਰੂਪ ਹੈ ਅਕਾਰ ਰੂਪ ਹੈ ਖਾਲ ਨਹੀਂ ਹੈ ਅਕਾਰ ਰੂਪ ਹੈ ਅਕਾਰ ਰੂਪ ਬਾਹਰ ਦੇ ਅੰਦਰ ਉਹਨੇ ਆਪਣਾ ਰੂਪ ਰਿਹਾ ਬਾਹਰ ਇਹ ਆਵਾਜ਼ ਰੂਪ ਦਾ ਸੁਭਾਅ ਹੈ ਪਰ ਬਾਹਰ ਆ ਰੂਪ ਨਹੀਂ ਆਇਆ ਇੱਕ ਖਾਸ ਮੂਰਤ ਨਹੀਂ ਬਣਾ ਸਕਦਾ ਮਿਲਚੇ ਹਰ ਹੈ। ਪਰ ਜੂਰ ਵਿਚਾਰ ਹੈ। ਔਰ ਹਿਰਦ ਵਿਚਾਰ ਹੈ। ਘਟ ਘਟ ਮੈਂ ਹਰ ਜੀ ਮੂਰਤ। ਵਿਸ਼ੰਗ ਨੂੰ ਜਿਹੜੇ ਵਿਸ਼ੰਗ ਕੀ ਮਾਰ ਤੇ ਫਿਰ ਪਿੰ। ਵਿਸ਼ੰਗ। ਵਿਸ਼ੰਗ ਮਾਇਆ ਨਾਲ ਉਹ ਹੀ ਸਤਿਗੁਰ। ਜਿਹੜਾ ਡਰ ਮਾਇਆ ਤੋਂ ਜਿਹੜਾ ਪਿੰ। ਮਾਇਆ ਦਾ ਜਗਦਰ ਨਹੀਂ ਰਾਜਾਦੀ ਹੈ। ਵਿਸ਼ਵ ਦੇ ਨਾਲ ਸੰਸਾਰ ਕੀ ਕਿਸ ਨੂੰ ਸੰਸਾਰ? ਵਿਸ਼ਵ ਹੋ ਰਿਹਾ, ਵਿਸ਼ਵ ਕੇ ਸੰਸਾਰ ਹੀ ਸੰਸਾਰ ਹੈ। ਸੰਸਾਰ ਹੀ ਸੰਸਾਰ ਹੈ। ਜਿੱਥੇ ਸੰਸਾਰ ਚਿੰਤਾ ਰਹੂ। ਚੇਤਨ ਤੇ ਚੇਤਨ ਦੇ ਵਿੱਚ ਚੇਤਨਾ, ਇਹ ਚਿੰਤਾ। ਚਿੰਤਾ ਚਿੰਤਾ। ਜੇ ਚਿੰਤਾ ਵਧਾਉਣੀ ਆ ਤਾਂ ਚਿੰਤਨ ਸ਼ੁਰੂ ਕਰ ਦੋ। ਇਹ ਚਿੰਤਾ ਨਹੀਂ ਨਾ ਜਿਹੜਾ ਹੈ ਚਿੰਤਾ ਹੈ ਚਿੰਤਨ ਸਿਮਰਨਾ ਹੈ। ਹਾਂ ਚਿੰਤਨ ਸਿਮਰਨਾ। ਸਿਮਰਨਾ ਨਹੀਂ। ਆਤਮ ਆਤਮ ਆਤਮ ਕੋਈ ਆਦਮ ਜਿਸਮ ਆਦਮ ਜਿਸਮ ਜੇ ਚਿੰਤਾ ਨੇ ਤਾਂ ਜਿਹੜਾ ਚਿੱਤ ਹੈ ਉਹਦਾ ਨਾਜ਼ ਹੋ ਜਾਣਾ। ਚਿੰਤਨ ਚਿੰਤਾ ਨਾਸ਼ ਕਰੇ। ਕਪੜੇ ਤੇ ਜਾਓ ਕੋਈ ਜੇ ਰਮ ਝੜ ਗਿਆ ਚਿੰਤਾ ਨਾ ਸਬਲੀਜਮ ਲੈ ਕੇ ਰੱਖੋ ਪਾਊਡਰ ਪਾ ਕੇ ਪਾਣੀ ਰਗ ਕਾੜ ਪਾ ਕੇ ਕਰ ਦੋ ਜਿਵੇਂ ਜਮ ਕਾੜਦੇ ਰੋੜੂ ਬੂਤ ਪ੍ਰਤੀ ਕਪੜਾ ਹੋਏ ਤੇ ਸਾਬਣ ਹੋਏ ਇਹ ਸਾਬਣ ਦਾ ਕੰਮ ਕਰ ਦਈਏ ਸਿਬੜ ਸਾਬਣ ਢਾਈ ਜਾਂਦਾ ਤੇ ਜ਼ਿਆਦਾ ਸਾਬਣ ਢਾਈ ਜਾਂਦਾ ਤੇ ਹਾਂ ਤਾਂ ਉਹੀ ਇੱਕ ਤਾਂ ਹੈਗਾ ਜਾਂ ਚਿੰਤਾ ਕਰੀਏ ਜਾਂ ਚਿੰਤਨ ਕਰੂ ਜਾਂ ਚਿੰਤਨ ਕਰਦਾ ਚਿੰਤਾ ਆਪੇ ਕਰਦਾ ਬਹੁਤ ਟੜਈਆ ਬਸ ਇਹ ਦੋਹਾਂ ਸੁਰਾਂ ਤੇ ਹੀ ਸੁਰਾਂ ਨੇ ਚਿੰਤਾ ਨਾਲ ਜੇ ਚਿੰਤਾ ਰੋਗਾਂ ਸ਼ੁਰੂ ਹੋ ਗਈ ਤਾਂ ਸਾਡੀ ਸ਼ੁਰੂ ਕਰਨ ਦੀ ਚਿੰਤਾ ਵੀ ਸ਼ੁਰੂ ਹੋ ਜਾਂਦੀ ਚਿੰਤਨ ਕਰਨਾ ਪੈਂਦਾ ਚਿੰਤਾ ਕਰਦੀ ਨਹੀਂ ਮਨ ਜਿੰਤਾ ਹਟਾਉਣੀ ਪੈਂਦੀ ਐ ਕਰਦੀ ਨਹੀਂ ਬਸਤੀ ਚਿੰਤਨ ਕਰਦਾ ਬੰਦਾ ਹਾਂ ਚਿੰਤਨ ਕਰਨਾ ਪੈਂਦਾ ਚਿੰਤਨ ਆਪਣਿਆ ਬਹੁੰਦਾ ਨਹੀਂ ਜਿਹੜਾ ਕਹਿੰਦਾ ਕੀ ਕਰੀਏ ਚਿੰਤਨ ਕਰੂ ਪ੍ਰੋਕ੍ਰੀਚ ਚਿੰਤਨ ਕੀ ਹੁੰਦਾ ਕਿਵੇਂ ਕਰੀਏ ਨਾਲੇ ਬੋਦਨ ਕੀ ਕਰੀਏ ਉਹਦਾ ਜਵਾਬ ਦੇਤਾ ਹਾਂ ਕਿ ਕਰੀਏ ਤਾਂ ਫੇਰ 90 ਸਵਾਲ ਹੋ ਫੇਰ ਤਾਂ ਫੇਰ ਪੜਨ ਲੱਗ ਜਾ ਫੇਰ ਤੂੰ 20 ਸਾਲ ਹੈ ਪਤਾ ਲੱਗ ਜੀ ਆਂ ਮੈਂ ਬੋਲੋ ਕਰੀਏ ਕੀ ਮੈਂ ਤਾਂ ਕਹਦਾ ਚਿੰਤਨ ਕਰ ਕੋ ਕੀ ਹੁੰਦਾ ਜੱਸ ਨੂੰ ਪਤਾ ਹੀ ਨਹੀਂ ਤੂੰ ਕੋਈ ਜਗਾ ਤੇ ਕੀ ਕਰੀਏ ਇਹਨੂੰ ਸਭ ਦਾ ਪਤਾ ਹੈ ਆਪੇ ਜਦੋਂ ਉਹ ਇਹ ਰੋ ਖੂਰੇ ਛਾਂ ਮਾਰ ਜਾਂਦੇ ਸਾਰਾ ਸਾਰਾ ਗੱਲ ਮੈਨੂੰ ਬੜੇ ਨੇ ਵੀ ਜਾਣ ਸਮਾਦੀ ਰਾਦਾ ਆਓ ਮੇਡੂ ਬਕੇ ਮਾ ਜਾਂ ਆਹ ਕੀ ਹੋਇਆ ਤੁਹਾਨੂੰ ਪਤਾ ਕੀ ਕਰਦੇ ਹੋ ਜੋ ਕਹਿੰਦਾ ਕੀ ਕਰੀਏ ਉਹ ਕਹਿੰਦਾ ਸਰ ਕੁਝਾ ਹੋ ਜਾ ਛਾ ਮਾਰ ਦੂ ਉਸਿਆ ਹਮਾਰੀ ਦੂ ਤਾ ਬਾਬੇ ਬਾਬੇ ਨੇ ਬੋਲਦਾ ਮੇਰੇ ਆਪਣੇ ਗੁਰੂ ਨੇ ਮੁਕਤੀ ਹੋ ਜੇ ਫਿਰ ਉਹਨਾਂ ਨੇ ਪਤਾ ਕੀ ਕਿਹਾ ਸੀ ਹਨ ਗੋਲ ਗੁੱਗੂ ਕੋ ਬਾਬਲੇ ਕੋ ਦਾਸ ਜੇ ਕੋਈ ਭੇਜਦਾ ਸਰੂਰ ਸੁਗ੍ਰਿਧੀ ਕਰੀਏ ਅਸਲ ਤੇ ਉਹ ਛਾਪਾ ਕਹਤਾ ਜੇ ਕੀ ਤਰਹ ਦੀ ਲੋਕਾਂ ਐਲੀ ਵੀ ਲੋਕਾਂ ਕਹਿੰਦਾ ਹੋ ਜਾ ਕੇ ਉੱਥੇ ਛਾਲ ਮਾਰਨ ਦਦੇ ਉਹਦੇ ਵਿੱਚ ਕਾਜੀ ਰੱਖਿਆ ਦੀ ਗੱਲ ਹੈ ਸੀ ਸਿਮਰੋ ਜਾਸਾ ਇੱਕ ਨਾਮ ਜਪਤ ਅਗੰਤ ਅਨੇਕ ਹੈ ਸਭਨੋਂ ਮਾਇਆ ਤੋਂ ਸਮਨੋਦਾ ਕਰਦਾ ਭਾਈ ਜੀ ਜਿਹਨੂੰ ਇੱਕ ਵਿਸੰਬਰ ਕਹਿੰਦੇ ਨੇ ਕੋਈ ਵਿਸੰਬਰ ਹੈ ਲੋ ਤੁਸੀਂ ਮੰਨਦੇ ਹੋ ਕਿ ਰਤਸਾ ਜੰਨੇ ਆਉਂਦਾ ਵਿਸੰਬਰ ਬਿਸਮ ਜੀ ਨੇ ਭਰਿਆ ਹੋਇਆ ਹੈ ਇਸ ਦਾ ਵੀ ਜਿਹੜਾ ਵਿਆਪਕ ਹੈ ਸਾਰਿਆਂ ਦੇ ਵਿੱਚ ਹਰ ਹਿਰਦੇ ਵਿੱਚ ਆਇਆ ਚਾਹੇ ਹਰਗਾ ਲੋ ਜਾਂ ਵਿਸੰਬਰ ਕਹ ਲੋ ਦੋਵੇਂ ਰੱਖੇ ਹਰਦੇ ਇੱਕ ਇੱਕ ਹੈ ਨਾਮ ਅਨੇਕ ਹੈ ਭਾਜੀ ਦਾ ਨਾਮ ਆ ਅਗਨ ਤੋਂ ਜੀਦਾ ਗਿਆਨ ਅਗਨਦਾਰ ਦੇ ਲੋਕ ਉਹਦਾ ਗਿਆਨ ਉਹਦਾ ਗਿਆਨ ਕਰ ਰਹੇ ਬੇਦ ਪ੍ਰਾਨ ਬ੍ਰਹਮ ਖੇਦ ਪੜਦਾ ਕਿ ਉਹਨੂੰ ਸਮਝ ਦੀ ਕੋਸ਼ਿਸ਼ ਜਿ ਲੱਗੇ ਨਾ ਸਾਰਾ ਬੇਦ ਪ੍ਰਾਨ ਸਮ੍ਰਿਤੀ ਸੁਧਾਖਰ ਕਿਨੇ ਰਾਮ ਨਾਮ ਇੱਕ ਅੱਖਰ ਆ ਬੇਦ ਪ੍ਰਾਨ ਦੇ ਵਿੱਚ ਨੇ ਵੀ ਅੱਖਰ ਆਇਦ ਲੋਹਦਾਇਦ ਸਰੇ ਸਖਰ ਜਣ ਰਾਮ ਹਰੀ ਰਾਮ ਨਾਮ ਇਹ ਜਿਹੜੇ ਅੱਖਰ ਸੀ ਆਏ ਹੋਏ ਜਿਵੇਂ ਬਸ਼ਬਰ ਹੈ ਉਹ ਵੀ ਅੱਖਰ ਹੈ ਸੁਧ ਕਰਾ ਨੂੰ ਕਰਨਾ ਤੁਹਾਨੂੰ ਕਿਹੜਾ ਆ ਰਹੇ ਨੇ ਥਲੇ ਪੈਰ 'ਚ ਹਲਸ ਜੀ ਆ ਪੈਰ ਦੇ 'ਚ ਜਿਵੇਂ ਹਾ ਹਿ ਦੇ ਵਾ ਆਖਰ ਆਖਰ ਹੋ ਆਖਰ ਉਰਦੂ ਦਾ ਲਖਦਾ ਆਖਰ ਆਖਰ ਅੰਤ ਨੂੰ ਇੰਨੇ ਅੰਤ ਨਾਲ ਇੱਕ ਅੱਖਰ ਆਖਰਕਾਰ ਆਖਰਕਾਰ ਜਿਵੇਂ ਆਪਾਂ ਉਹ ਵਾ ਕਰਦਾ ਆਖਰ ਸਾਰੇ ਇਕੱਤਰ ਜੋੜੇ ਇੰਨੇ ਰਾਮ ਨਾਮ ਇੱਕ ਅੱਖਰ ਆਖਰ ਨੂੰ ਇੱਕ ਰਾਮ ਨਾਮ ਲੜੇ ਰਾਮ ਰਾਮ ਦੇ ਰੋ ਰੋ ਆਹ ਨੂੰ ਇੱਕ ਰਾਮਨਾਮ ਵਾਲੇ ਜੋੜੇ ਨੇ 35 ਬੁਸ਼ਪਰ ਚਾਹ ਰਾਮਕਲੋ ਚਾਹ ਬੁਸ਼ਪਰ ਕਲੋ ਕੋਈ ਜਿੰਨੇ ਵੀ ਦੇ ਨਾਮ ਆਇਆ ਫੜੀ ਕਲੋ ਚਾਹ ਆਖਰ ਹਾਂ ਰਾਮਨਾਮ ਬਣਾ ਕੇ ਸਾਡੇ ਦੱਸੇ ਨੇ ਸਾਰੀ ਕਿੰਨੇ 3 ਜਿੰਨੀ ਵੀ ਇਹ ਲਿਖਦਾ ਹੂੰ ਜਿੱਤੇ ਡਿਫਰੈਂਟ ਕਿਸਮ ਦੇ ਲੱਭਦਾ ਸਾਹਿਬ ਚ ਉਹ ਵੀ ਚਾਏ ਜਿਹਨੇ ਵੀ ਆ ਇਸ ਬਾਣੀ ਦੇ ਵਿੱਚ ਉਹ ਨਾ ਗੂ ਨਾ ਗੂ ਆਉਣਗੇ ਵੀ ਸਾਲਾ ਖਰਚ ਉਸੇ ਨਾਲੇ ਜੋੜ ਰਹੇ ਇਹ ਮਤਲਬ ਉਹ ਉਹ ਟਿੱਕਾ ਦਾ ਹੀ ਸਮਝਦੇ ਨਾਲੇ ਜੋੜ ਰਹੇ ਉਸੇ ਦਾ ਨਾਮ ਨਹੀਂ ਰਾਮ ਰਾਮ ਨਾਮ ਨੇ ਇਹ ਇੱਜ਼ਤ ਕੀਤੇ ਰਾਮ ਦਾ ਨਾਮ ਮੰਨ ਕੇ ਉਹਨੂੰ ਰਾਮ ਬਦਕੇ ਹੀ ਜੀ ਨੂੰ ਰਾਮ ਬਦਕੇ ਹੀ ਇੱਥੇ ਅਸੀਂ ਪਾਣੀ ਦੇ ਜੇ ਬਿਸ਼ੰਭਰ ਆ ਗਿਆ ਕਿਤੇ ਹੋਰ ਨੂੰ ਮੰਨ ਲਿਓ ਗਾਮ ਕੋਲ ਹੋਰ ਆ ਬੇਤਰ ਆਮਗੇ ਤੇ ਹਰੀ ਆ ਗਿਆ ਕੋਈ ਹੋਰ ਤੁਸੀਂ ਕਹੋ ਹੋਰ ਆ ਗਿਆ ਜਿੱਦਣ ਆਉਂਦੇ ਉਹਦੇ ਹੀ ਇੱਕ ਜਿਸ ਜੀ ਮਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਫੋ ਜਿਹੜਾ ਹੈ ਗਿਆਨ ਇਹਦੇ ਵਿੱਚ ਰਾਮਨਾਮ ਇੱਕ ਆਪਣਾ ਆਖਰ ਦੇ ਵਿੱਚ ਆਂਦਰ ਰੱਬ ਰਾਮਨਾਮ ਨਾਲ ਕੋਈ ਵੈਰ ਨਾ ਸਾਰਿਆਂ ਦਾ ਇਹਦਾ ਬਿਆਨ ਦਾ ਜੇ ਇੱਕ ਕਣਕਾ ਥੋੜਾ ਜਿਹਾ ਵੀ ਕਿਸੇ ਦੇ ਬੰਦੇ ਪੈ ਜਾ ਸਮਝ ਆ ਜਾ। ਪਰ ਉਹ ਮੰਨ ਲਵੇ। ਉਹਨੂੰ ਪਹਿਲਾ ਸੁਰੀ ਆ ਜਾ ਫਿਰ ਉਹਨੂੰ ਬਦਲ ਜੀ ਬਸਾਵੈ ਨਾ ਬਦਲ। ਤਾਂ ਕਿ ਮੰਨੋ ਨਹੀਂ ਤਾਂ ਕਿ ਵਿਰਵਾ ਕਰੀ ਉਹਦੀ ਬੁੱਧੀ ਕਿੰਨੀ ਵਿਕਸਿਤ ਹੋ ਚੁੱਕੀ। ਪਰ ਤਾਂ ਵੱਡਾ ਹੋ ਜਾਣਾ। ਉਹਦੀ ਬੁੱਧੀ ਦਾ ਕਿੰਨਾ ਵਿਕਾਸ ਹੋ ਚੁੱਕਿਆ। ਇਹ ਦੱਸਣ ਨਹੀਂ ਦਿੰਦਾ। ਅਜੇ ਕਿਸੇ ਨਾਲ ਉਹ ਨਹੀਂ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਸਤਿ ਸ੍ਰੀ ਅਕਾਲ। ਬੱਤਰੀ ਫਿਰ ਉਹਨਾਂ ਦੇ ਸਹੂਤ ਸੌਂਗਨ ਦੀ ਗੱਲ ਤੇਰੀ। ਦੁਪਹਿਰ ਆਉਂਦੇ ਨਾ ਜੇ 12 ਬੰਦੇ ਤੇਰ ਮਾ ਆ ਗਿਆ ਆ। ਉਹ ਨੰਬਰ ਤੇ ਆਗਈ। ਕੋਈ ਚੀਜ਼ ਕੋ ਜਿੰਦੀ ਜੋ ਪਰੇਦੀ ਨਾ ਹੋ ਗੱਲ ਜੀ। ਗਣੀ ਨਾ ਹੈ। ਹੋ ਗੱਲ ਜੀ। ਹੋ ਗੱਲ ਉਹਦੀ ਗੰਤੀ ਨਹੀਂ। કાંઠી એકે સાસો તો હારો નાનું ઓણસાક મોહે ઉઢાવ કાંઠી કાંઠી એકે કામચ્છા દ કામચ્છા લવડે જીલો કામચ્છા હોય છે ઈચ્છા એટલે રહે તો ઓરદ શરીર દીવી ચાલ્તુંવાય ને હ પ્રોટીની ઈચ્છા પાણીની ઈચ્છા ઠોક લગણી પ્રાસ લગણી ગરમી લગણી સરદી લગણી ਕੋਈ ਨਾ ਪੰਦੇ ਲੈਵਲ ਤੇ ਇੱਛਾ ਉਹ ਮੰਗਦੇ ਲੱਗਦੇ ਨਹੀਂ ਚੱਲਣਾ ਅਕਾਉਂਟ ਸਰ ਪਿਆਸ ਹਮ ਕਾਲ ਦੀ ਪਿਆਸ ਹੁੰਦੀ ਹੈ ਇੱਥੇ ਲੱਗਿਆ ਵੀ ਕਾਂਖਾ ਹੋਰ ਤਰ੍ਹਾਂ ਦੇ ਵੀ ਹੋਦੇ ਇੱਥੇ ਕਾਂਕੀ ਇੱਕ ਹੈ ਦਸ ਤੋਂ ਹਰ ਬਸ ਇਹੀ ਤਰੀਕੇ ਦੇ ਵੀ ਹੈਗੀ ਹੈ ਪਰ ਇੱਕ ਹੈ ਜਿਹਨੂੰ ਇਹ ਇੱਕ ਵੀ ਹੈ ਜਿਹੜਾ ਇੱਕ ਹੈ ਨਾ ਕਾਛੂ ਤੋਂ ਆਪ ਕੀ ਕਹਿੰਦੇ ਸਿੱਖ ਦੀ ਜੰਮਦੀ ਜੇ ਕੰਮ ਕੀ ਪ੍ਰਿਆਸਰ ਦੱਸ ਤੇ ਹਰੋ ਉਹਨਾਂ ਦੀ ਸਬਤ ਬਣਾਉਂਦੇ ਨਾਲ ਇਹਨਾਂ ਨੂੰ ਉਹਨਾਂ ਨੂੰ ਬੋਹੇ ਉਧਾਰੋ ਨਾ ਲੱਗਦਾ ਮੈਨੂੰ ਉਹਨਾਂ ਨੇ ਸਭ ਕਰਦੇ ਕੋਈ ਰਵਿਦਾ ਰੋ ਸਤਿਆਸ ਯਾਤਰੀ ਜ਼ਰੂਰੀ ਹੈ ਕਿਰਾਂ ਬੋਲਣ ਵਾਲੀ ਵੀ ਕੰਮ ਚਾਹੀਦੀ ਹੈ ਹਾਂ ਬੋਲਣ ਦੀ ਵੀ ਕੰਮ ਸੁਖਮਨੀ ਸੁਖ ਅਮਰ ਨਾਮ ਭਗਤ ਜਨਾ ਕੇ ਮਨ ਵਿਚਰਾਉ ਜੇ ਇਹ ਤੇ ਅਨੁਭੂਤੀ ਬੋਲਦੇ ਜੀ ਹਮ ਆਪਾ ਥੱਲੇ ਦੇ ਲੈਵਲ ਦੀ ਗੱਲ ਕਰੀ ਹਮ ਦੇ ਤਾਂ ਸੀ ਨਾ ਚਿਤ ਕੀ ਚਾਹ ਤਾਂ ਪਹਿਲਾਂ ਦੀ ਇਛਾ ਤਾਂ ਪਹਿਲਾਂ ਤੇ ਤਾਂ